ਕਹਿੰਦਾ ਜਾਂਦਾ ਜਨਸੀਓ ਪਰਦਾ ਲਾਯੋ ਉਹਦਾ ਥੇਲ ਹੈ ਬੰਦਾ ਫਾਦਰ ਦੇ ਪਰਦਾ ਲਾਦੇ ਨੇ ਸਾਰੇ ਇਦਾਂ ਨੂੰ ਛੱਡ ਕੇ ਔਲੰਘ ਕੇ ਸਤਿਗੁਰੂ ਵੱਲ ਆ ਜਾਂਦਾ ਨਾ ਜਦੋਂ ਉਦੋਂ ਤੇ ਸਤਿਗੁਰੂ ਕਿਸੇ ਪਤਾ ਰੱਖਦਾ ਜਿੰਨਾ ਕੋ ਇਹ ਪਰਦਾ ਰੱਖੀ ਪਰਦਾ ਗੁਰਮਤਿ ਵਿੱਚੋਂ ਅਜਨਾਨ ਵਿੱਚੋਂ ਪ੍ਰੇਮਿਤੋ ਤੀਤ ਵਿੱਚੋਂ ਉਹਨਾਂ ਨੂੰ ਪਤਾ ਇਹ ਲੱਗਿਆ ਹੋਇਆ ਇਸ ਤਰ੍ਹਾਂ ਆਇ ਪਰ ਤੇ ਕੀ ਕਰੇ ਲਾਹਾਂ ਫਿਰ ਪਾਵੇਵੇਂ ਅੰਮ੍ਰਿਤ ਹੈ ਉਹ ਕਿਸ ਦੇ ਪਾਸ਼ਾ ਕਰੇ ਤੇ ਦੁਪਹਿਰ ਲੱਗੀ ਜੇ ਤਾਂ ਮਹੀਨਾ ਨੂੰ ਤਰੇ ਲੱਗੀ ਹੋਈ ਖੇਤੀ ਕਰੋ ਸਿੱਖੋ ਮੈਂ ਜਾਲ ਜਿਗਾਓ ਗਾਇ ਸੁਨੀਤ ਕਾਹਨ ਆ ਗਿਆ ਪੂਰ ਜੀਵਤ ਰਹਿ ਗਈ ਹਨ ਉਹ ਚਰਨ ਜਾਂ ਕਿ ਜੂ ਆਨੇ ਜਮਉ ਸਾਰਿਆ ਲੋ ਪਾਏਨਾ ਚਰਨਾ ਦੇ ਬਾਬਤ ਤੇ ਹੋ ਗਾ ਕਿਹਾ ਗੁਰਬਾਣੀ ਚ ਮਾਈ ਚਰਨ ਪਰ ਆਮ ਆਸੇ ਪ੍ਰੀਤ ਭਾਵਨਾ ਦੀ ਇਹਦਾ ਨਾਏ ਗੁਰਬਾਣੀ ਵਿੱਚ ਮਾਈ ਚਰਨ ਗੁਰ ਮਿੱਠੇ ਪਹਾੜ ਦੇਵੇਂ ਪਰਮੇਸ਼ਰ ਦੇ ਉਹ ਨਾ ਨਾ ਜਿਹੜੇ ਹਨ ਤੇ ਪ੍ਰੋਗਰਾਮ ਫਾਇਦੇ ਦੇ ਹਨ ਕਿ ਇੱਕ ਅਜਿਹੀ ਨੀਲਾ ਹਾਲ ਲੋਕਦੇਤਾਂ ਨੂੰ ਦੇਣ ਵਾਲਾ ਸਾਥ ਹੋਵੇ ਜਿਸੇ ਸਾਥ ਜਾ ਬਕਤੀ ਕਰੇ ਐਸੇ ਰਾਹੀ ਵਾਸਤੇ ਉਹ ਸਾਧਨ ਨਾ ਜਾਪੇ ਮਾਨਸਕਾ ਦਾ ਰੂਪ ਨਾ ਜਾਵੇ ਉਹ ਆਦਮੀ ਨਾ ਤੋਂ ਵੀ ਨੂੰ ਉਹ ਪਰਮੇਸ਼ਰ ਅਕਾਲ ਪੁਰਖ ਤੇਰੇ ਕੋਲ ਆ ਕੇ ਬੈਠਾਇਆ ਤੇ ਫੇਕ ਨਾ ਸਹੀ ਇਹ ਦੱਸੋ ਸਾਥ ਜੀ ਗੁਰਬਾਣੀ ਜਉਂਦਾ ਕਟਕੜ ਵਿੱਚ ਹਰ ਜੂ ਕੋਈ ਖਲੀਫਾ ਕਰ ਮੈਨੂੰ ਆ ਕਿਉਂ ਕਰਨਾ ਕਦੇ ਮਾਸ ਤੋਂ ਬਚਾਇਆ ਹੋਏ ਬੁਰੇ ਕੰਮ ਤੋਂ ਬਚਾਇਆ ਹੋਏ ਕਿੱਥੇ ਹਾਰਨੇ ਪਾਰੇ ਸਾਰੀ ਸਿਰਾਂ ਤਾਕਤ ਪਰ ਕਿਤੇ ਨੂੰ ਬਚਾਇਆ ਨਹੀਂ ਕੌਣ ਬਚਾਉਂਦਾ ਆਪ ਕਿਰਪਾ ਕਰਦੇ ਹਨ ਇਸ ਕਰਕੇ ਜੋ ਕਟਕੜ ਵਿੱਚ ਹਾਰਾ ਉਹ ਸਾਰੀਆਂ ਕਟਾਂ ਦਾ ਮਾਲ ਜਿਹੜਾ ਉਹ ਇੱਕ ਰੂਪ ਮੰਨ ਕੇ ਉਹ ਦੱਸ ਦਿੰਦੇ ਹਨ ਆ ਕਿ ਆਪਣੇ ਤਿਆਰਿਆਂ ਨੂੰ ਇਹ ਜਲਦੇ ਫਲ ਦੇ ਸੰਸਾਰ ਮਨਮਤ ਸਾਰੇ ਜੀਮਤ ਪਾਉਂਦੇ ਹਨ ਵਿਭਾਗਦੇ ਹਨ ਇਹੋ ਕਰਦੇ ਹਨ ਜਿਹੜੇ ਲੱਗੇ ਹਨ ਇਹਨਾਂ ਨਾਲ ਦੇਤੀਤੀ ਅੱਜ ਪ੍ਰਾਪਤ ਹੋਏ ਹਨ ਦੋਨੇ ਵਿਅਕਤ ਚੰਨਾਂ ਨਾਲ ਨਾਲ ਕਰਿਆ ਤੇ ਛੰਡਾ ਜਾ ਲੈ ਲਗ ਲੋ ਆਪਹੀ ਸਿਤ ਲਾਇਓ ਤੇ ਸਾਥਿਆ ਲੋਵਾਂ ਲਾ ਜਲ ਠੰਡਾ ਹੋਇਆ ਬੜੀ ਲੱਗੀ ਸੀ ਅਰੇ ਜੀ ਜਿੱਤਾਂ ਆਪ ਛਗੋ ਤੇ ਫੇਰ ਜਲਤੀ ਕਰਾਂਗੇ ਜੀ ਇਸਰਾ ਜਲ ਨੂੰ ਦੇਖ ਕੇ ਮੇਰੇ ਤੇ ਛਾਲ ਆ ਗਿਆ ਜ਼ਹਿਰ ਕਾਵ ਸਤਿਗੁਰੂ ਤਾਰੇ ਹੋਰ ਸਾਥ ਆਈ ਨੇ ਖੜੀ ਐ ਜੇ ਸਾ ਚੰਗਰੀ ਥੱਲੇ ਉਤਰੇ ਹਨ ਉਹ ਥੱਲੇ ਸਾਜਦਾ ਜੇ ਗਲਾਜ ਜਾਂ ਤੁਬਾਜੀ ਹੋਵੇ ਇੱਕ ਖੇਤੀ ਨਾਲ ਜਾ ਕੇ ਪੱਤਾ ਲਿਆਂਦਾ ਉਹਦੇ ਜੂਨਾ ਬਣਾ ਲਿਆ ਜਸ ਸੋਣ ਵਾਸਤੇ ਸਾਗੂ ਰੂਪੇ ਬੜਾ ਬਣਦਾ ਕੋਈ ਜਗਾਏ ਕਰਦੇ ਪਾਦੇ ਜੇ ਜਲ ਕਿਹੜਾ ਹੁਣ ਉਸਾਰ ਤੇ ਮੁੱਕ ਹੋ ਸਕਦਾ ਕਰੇ ਦੇਨ ਲਾਈ ਬੰਦੇ ਦੀ ਜੀਵਤ ਇੱਕ ਅਨੰਦ ਹੋਇਆ ਇਸ ਦਾ ਹੋਵੇ ਸਦਾ ਵਾਸੇ ਬਕੀ ਕਰੇ ਸ੍ਰੀ ਹਰਿ ਗੋਬਿੰਦ ਕੋ ਫਕਰ ਸਾਹਿਬ ਜੀ ਜੋ ਫੇਰ ਫੇਰਨਾ ਦੇਸ ਕਾ ਨੀ ਪਾਉਣਾ ਪੂਰੀ ਕੰਨੋ ਅਸਤੇ ਉਹ ਜਲ ਜਿਹੜਾ ਖਾਲਿਆ ਤੇ ਕਰਿਓ ਪਾਣਾ ਸੁਨ ਬਾਗ ਅਲਾਇਓ ਉਹ ਜਲ ਠੱਕੇ ਨਾ ਤੇ ਕੀ ਅਗਿਆ ਸੁਨ ਪਾਇਤੋ ਜਾਣੇ ਅਵਰਕੇ ਜਾਣੇ ਤੀਰ ਭਰੀਆ ਕੀ ਜਾਣ ਸਕਦਾ ਹੈ ਉਹ ਜਲ ਚੁਕਿਆ ਇੱਥਾਂ ਦੇ ਹੋਰ ਥਾਂ ਪਿਆਰ ਨੂੰ ਮੁਖਰਾਤੇ ਉਹਨਾਂ ਦੀ ਭਾਵਨਾ ਨੂੰ ਮੈਂ ਇਸ ਤਰ੍ਹਾਂ ਦਾ ਜਲ ਕਦੀ ਅੱਜ ਛੱਗਿਆ ਹੀ ਨਹੀਂ ਨੂੰ ਤਰ੍ਹਾਂ ਪਿਆਰ ਦੇ ਨਾਲ ਮੈਨੂੰ ਅਜੇ ਤੱਕ ਜਲ ਸਿਕਾਇਆ ਹੀ ਨਹੀਂ ਯਾਰ ਦੇ ਨਾਲ ਇਸ ਤਰ੍ਹਾਂ ਜਲ ਮੈਂ ਛਗੇ ਹੀ ਅੱਗੇ ਨਾ ਤੇ ਵਿਸਾਈ ਐ ਆਪ ਤੁਸ ਨੇ ਖਾੜ ਪਾਣ ਮਕਾਈ ਸੱਜੇ ਪਾਛੇ ਇਹੋ ਕਹੀ ਜਾਂਦੇ ਸੀ ਆਪਣੇ ਤਿਆਰਿਆਂ ਦੀ ਬਾਹਮਣ ਆਪ ਤੁਮ ਪੀਓ ਕਹਿਣ ਲਗੇ ਮੈਂ ਆਪ ਤੁਸ ਮਾੜਿਆ ਆਪ ਤੁਸ ਵੰਡ ਰਹੇ ਆਈ ਪੀਓ ਤੁਸੀ ਬਗਦੇ ਨਾਲ ਮੁਕੰਤੀ ਦਾ ਬੁਰਾ ਨੇ ਮਾਹਰਾ ਚੋੜੇ ਮੈਂ ਸਰਗਾ ਕਾ ਅੱਜ ਲਈ ਐਉਂ ਚੰਗਾ ਜਿਸ ਤਰ੍ਹਾਂ ਤੇ ਚੋੜੇ ਵਿਸਵਾਰਿ ਖਾਣੇ ਲੰਦੇ ਆਪੋ ਸੇਈ ਸਦ ਕਰਦੇ ਚਾਹੁੰਦਾ ਸਾ ਵੀ ਐਉਂ ਕਰਕੇ ਛੰਡਾ ਮਿਲੇ ਤੇ ਮਿਲਿਆ ਨਹੀਂ ਕਿਤੇ ਤੇ ਮੈਂ ਲੱਭਦਾ ਲੱਭਦਾ ਇਸਨਾਂ ਚੱਲ ਜਲ tham tham ਤਰ੍ਹਾਂ ਦੇ ਜਲ ਵਰਗਾ ਛੰਡਾ ਇਸ ਤਰ੍ਹਾਂ ਦਾ ਮੈਂ ਕਦੀ ਪੀਤਾ ਹੀ ਨਹੀਂ ਵਾਰੰਗੀ ਵਾਰ ਤਰਾਹਣ ਕੀਓ ਜਿਸੇ ਬਾਛਾ ਗਰੀਬ ਨਾ ਜਿ ਖੜੀ ਕਰੀ ਆਪਣੇ ਪਿਆਰ ਦੇ ਜਾਨ ਨੂੰ ਉਹ ਲੱਭੇ ਹਨ ਉਹਦੀ ਆ ਪੁੱਤਰ ਗੁਰ ਆਏ ਦੁਕਾਈ ਜਦੋਂ ਬਾਦਾ ਹੁਕਮ ਕੀਤਾ ਆ ਗਿਆ ਰਹੀ ਸਦੂਆਂ ਦੀ ਫੇਰ ਕਰਿਓ ਪਾਨ ਗਲ ਤਰਖਾ ਨੇ ਹੁਕਮ ਇਸ ਖਾਨੇ ਦੀ ਜਾਂਚ ਕਰਕੇ ਉਹ ਕਿੰਨੇ ਚਿਰ ਤੋਂ ਪਤਾ ਨਹੀਂ 2 ਘੰਟੇ ਦੀ ਚੀਜ਼ ਹੋਣੀ ਤਹਿ ਦੀ ਤੋਂ ਉਹ ਫਾਇਰ ਫਰਦੀ ਵਿੱਚ ਦੇ ਚਲ ਗਿਆ ਜਲ ਪੀ ਜਾਂਦੇ ਰੋਣਗੇ ਅੱਜ ਜਲ ਦਾ ਜੋ ਆਨੰਦ ਹੈ ਉਹ ਹਰਕਤ ਹਰਕਤ ਤੋਂ ਬਾਹਰ ਲਾਗੇ ਉਹ ਖਿਜੀ ਦੇ ਨਾਲ ਫੇਰ ਤੁਸੀਂ ਪਾਸ਼ਾ ਗਰੀਬ ਆਜੂ ਅਜਾ ਪੱਖਾਂ ਜਾਂਦੇ ਹਨ ਪੂਰਬ ਜਨਮ ਪੂਨ ਜਨ ਜਾਗੇ ਆਂਗਰੀ ਇਹ ਇਉਂ ਨਹੀਂ ਮਿਲਿਆ ਤੇ ਪੂਰਬਲੇ ਜੀਨ ਮਸਤ ਤੁਹਾਨੂੰ ਕਾਹਨ ਮਿਲਿਆ ਇਸ ਦੀ ਮਾਛਾ ਭਗਤੀ ਤੋਂ ਆਮ ਜੀਂਦੀ ਸੀ ਜੋ ਭਗਤੀ ਨੂੰ ਆਇਆ ਉਹਦਾ ਜੀਸਾ ਵਰਤਿਆ ਜੋ ਉਹ ਆਏਗਾ ਤੇ ਉਹ ਦੂਰੇਗਾ ਇਹ ਜੋ ਤੋ ਹੈ ਭਾਰਤਰਾਮ ਆਬਨਾਤੀ ਅਗਨ ਵੰਝਾ ਜਨਨ ਕੋ ਗੋਬਿੰਦ ਹੈ ਗੁਣ ਨਾ ਜਾ ਨਾ ਕਹ ਹਰ ਹਰੇ ओ मन मेरे पुल को न ले कोई नायक ति जानमदा राखो ही है पुरो नाही पुल ते भगत